ਜੀ ਪਹਿਨਾ ਪੂਰਨ ਬ੍ਰਹਮਣੀ ਸੀ ਜਿਹੜਾ ਜਦੋਂ ਉਹ ਜਿਹੜੇ ਬ੍ਰਹਮੰਡ ਖੱਡੇ ਸੀ ਅੱਛਾ ਜੀ ਜਿੱਦਾਂ ਜਦ ਬ੍ਰह्म ਪੂਰਨ ਹੀ ਹੈ ਜਿਹੜਾ ਬ੍ਰह्म ਹੈ ਉਹ ਖੱਡਾ ਹੁੰਦਾ ਬ੍ਰह्म ਅੰਦਰ ਜਿਹੜਾ ਹੁੰਦਾ ਖੱਡੇ ਹੁੰਦਾ ਹਾਂ ਹਾਂ ਭਰਮ ਦੇ ਵਿੱਚ ਘਰਿਆ ਹੋਇਆ ਜਿਹੜੀ ਹੈ ਨਾ ਹਾਂ ਹਾਂ ਅੰਦਰ ਭਰਮ ਦੇ ਬ੍ਰह्म ਪੂਰਨ ਪੂਰਨ ਬਧਮ ਕੀ ਹੁੰਦਾ ਹਾਂ ਹਾਂ ਪੂਰਨ ਬਧਮ ਕਾਹ ਹੁੰਦਾ ਹਾਂ ਹਾਂ ਕੇ ਮਨ ਪ੍ਰਗਾਸ ਜੈਸਾ ਤਾਰ ਉਪਰ ਅਕਾਸ਼ ਹਾਂ ਹਾਂ ਕੁਰਬਾਨੀ ਦਾ ਸਾਰਾ ਗਿਆਨ ਜਾਂ ਤਿੰਨ ਸਮਝ ਲੈਣਾ ਹਾਂ ਪੂਰਨ ਬਧਮ ਅੱਛਾ ਜੀ ਕੁਰਬਾਨੀ ਵਿੱਚ ਤਿੰਨ ਲੋਕ ਦਾ ਗਿਆਨ ਤਿੰਨ ਲੋਕ ਦਾ ਗਿਆਨ ਠੀਕ ਹੈ। ਦੋਥੇ ਲੋਗ ਆ ਗਏ ਆ ਜਿਹੜਾ ਹੈ ਉਹ ਹੁੰਦਾ ਟਰਕੀ ਬਾਂਦੀ ਦਾ। ਹੂੰ ਤਿੰਨ ਦੇ। ਅੱਛਾ। ਹਾਂ। ਭਾਵੇਂ ਜੀਬ ਗਲਪ ਵਿੱਚ ਹੈ ਦੋ ਦੇ ਪੇੜ ਤੇ। ਹਾਂ ਹਾਂ। ਭਾਵੇਂ ਜੀਬ ਸ਼ਰੀਰ ਵਿੱਚ ਹੁਣ ਆਪਾਂ ਜੀ। ਦੋ ਪੀੜੀਆਂ ਹੋ ਗਈਆਂ। ਹਾਂ ਇਹ ਵੀ ਲੋਅ ਜਿਹੜੀ ਵਰਕੇ ਬਾਦ ਦੇ ਵਿੱਚ ਹੈ ਅੱਛਾ ਜੀ ਵਰਕੇ ਬਾਦ ਦੇ ਵਿੱਚ ਜਿਹੜਾ ਹੈ ਉਹ ਸੁਖਬ ਹੋ ਗਿਆ ਅੱਛਾ ਜੀ ਦੂਜਾ ਲੋਕ ਇਹ ਹੈ ਆ ਮਾਂ ਨੇ ਗਲਬ ਕਿ ਆ ਗਿਆ ਹੂੰ ਇੱਕ ਸਰੀਰ ਹੋ ਗਿਆ ਇੱਕ ਸਰੀਰ ਸੁਖਬ ਹੋ ਗਿਆ ਸੁਖਬ ਸਰੀਰ ਤਾਂ ਹੈ ਉਹ ਹੈ ਹਾਂਜੀ ਇੱਕ ਮਾਂ ਦਾ गर्भ ਹੋ ਗਿਆ ਉਹਦੇ ਵਿੱਚ ਆ ਕੇ ਬਣ ਗਿਆ ਹੂੰ ਇੱਕ ਹੀ ਸਰੀਰ ਆਪਣੇ ਵਾਸਤੇ ਬਣ ਰਿਹਾ ਹੈ ਅੱਛਾ ਜੀ ਉੱਤੇ ਦੋ ਸਰੀਰ ਆਇਆ ਦੇਖੋ ਜਾਂਦਾ ਕਿ ਫਿਰ ਇਹਦੇ ਕੋਈ ਕੀ ਆਇਆ ਇਹ ਨਾ ਸ਼ੂਕ ਬੁੱਧਾ ਅੱਛਾ ਜੀ ਖਾਂਦਾ ਪੀਂਦਾ ਵੀ ਨਹੀਂ ਹਾਂ ਉੱਤੇ ਵੀ ਕੁਝ ਨਹੀਂ ਹੈ ਸੋਚ ਵੀ ਬੰਦ ਹੈ ਹੂੰ ਦੀਨਾ ਬਲੀ ਸੁਖਦਾ ਬੋਲਦਾ ਬਲੀ ਉਹ ਲੋਕ ਆਡਾ ਉਹ ਜ਼ਿੰਦਗੀ ਵੀ ਅਸੀਂ ਗਲਦੇ ਨਹੀਂ ਹੈਗੇ ਅੱਛਾ ਜੀ ਆਗਲਾ ਬੱਚਾ ਉਥੇ ਜੂੜਾ ਹੈ ਉਹ ਜੀਵਨ ਗਰਿਆ ਨਹੀਂ ਜਾਂਦਾ ਉਹ ਲੋਕਾਂ ਹਾਂ ਜੇਲ ਜੀਵਨ ਸ਼ੁਰੂ ਗਲਦੇ ਔਰ ਜੀਵਨ ਹੁੰਦੇ ਹੈ ਉਹ ਲੋਕ ਬਖਰਾ ਬੱਚਾ ਜਿਉਦਾ ਹਥੇ ਠੀਕ ਹੈ ਜੀ ਪਰ ਅਸੀਂ ਜੀਵਨ ਕਿਉਂ ਦੀ ਬਸਦੇ ਹਾਂ ਹੂੰ ਜੀ ਨਮਸਕਾਰ ਹਾਂ ਜੀ ਫਸੇ ਇਹ ਕਰਕੇ ਤੈਨੂੰ ਲੋਕ ਬੁਝਦੇ ਹੂੰ ਹੂੰ ਅੱਡ ਅੱਡੇ ਲੋਕ ਨੇ ਹਾਂ ਹਾਂ ਇੰਨੇ ਲੋਕ ਦੇ ਵਿੱਚ ਕੀ ਅਵਸਥਾ ਹੁੰਦੀ ਹੈ ਜੀਵ ਦੀ ਇਹ ਗੁਰਬਾਨ ਠੀਕ ਹੈ ਕਿਉਂ ਕਿੰਨਾ ਲੋਕਾਂ ਜਾਂਦਾ ਕੀ ਕਰਦਾ ਹੈ ਕਿ ਉੱਥੇ ਉਹਦਾ ਪਿਛਤਾਨ ਜ਼ਿਕਰ ਆ ਗੁਰਬਾਨੀ ਹੂੰ ਗਰਭ ਦੇ ਵਿੱਚ ਕੀ ਹੁੰਦਾ ਉਹ ਤੇ ਦੱਸਿਆ ਨਹੀਂ ਹੂੰ ਰੇ ਨਾ ਗਰਭ ਕੋਟਲ ਦੇ ਆਛਤ ਉਰਭ ਤੇ ਹੱਲ ਲਿਬਾਗਾ ਹੂੰ ਤਾਂ ਸਿਆ ਆ ਫਿਰ ਜਿਆਦਾ ਕਈ ਕਮੀਰ ਤੇ ਇਹਨਾਂ ਜਗ੍ਹਾ ਡੰਡ ਮੂੜਵੇ ਲੱਗੇ ਹੂੰ ਕਿਆ ਗੁਰ ਸੇਵਾ ਤੇ ਭਗਤ ਕਮਾਈ ਤਵੇ ਬੰਸ ਦੇ ਹੀ ਪਾਈ ਇਹ ਮਾਲ ਦੇ ਇਹ ਤਾਂ ਪਹਿਲਾਂ ਤਾਂ ਕੀ ਕੀਤਾ ਸੀ ਗੁਰਦੇਵਾਂ ਦੇ ਪੈਸੇ ਗੁਰਸੇਵਾ ਪਾਣੀ ਚੱਲਣਾ ਪੈਂਦਾ ਤਾਂ ਗੁਰਦੇ ਜਾਂ ਹੋਈਆਂ ਨੇ ਅੱਛਾ ਲੋਕ ਨੇ ਇਹ ਪਾਣੀ ਕਿਉਂ ਮਿਲਦਾ ਹੂੰ ਇਹਨੇ ਗਲਤੀ ਕਰਦੇ ਹਰਨ ਅੱਛਾ ਜੋ ਤੁਗਵਾਉਣ ਹੈ ਇੱਥੇ ਆ ਕੇ ਜਨ ਮਿਲ ਜਾਂਦੇ ਨੇ ਫਿਰ ਵਾਕੇ ਚਲੇ ਜਾਂਦੇ ਹੂੰ ਹੂੰ ਅਜੇ ਨੂੰ ਸਮਝ ਆ ਜਾਂਦੀ ਚੌਥੇ ਲੋਕ ਦਾ ਗਿਆਨ ਹੈ ਇਹਦਾ ਜਦ ਹੁੰਦਾ ਸੰਪਰਕ ਸ਼ਬਦ ਨਾਲ ਤੁਰਕੀ ਬਾਣੀ ਚੌਥੇ ਲੋਕ ਵੀ ਗੱਲ ਦੱਸਦਾ ਫਿਰ ਲੋਕਾਂ ਨੂੰ ਆ ਜਿਹੜੀ ਗੁਰਬਾਣੀ ਦੱਸੀ ਹੋਈ ਹੈ ਕਰਦੀਆ ਹਰ ਦਰਗਾ ਜੇ ਵਤਨਾ ਨਾਮ ਕਾਸ ਸੁਣਾਵੇ ਹੂੰ ਭਗਤੀ ਕੀ ਹੈ ਅਸਲ ਉਹ ਗੁਰ ਉੱਥੇ ਕਿਹੜੀ ਭਗਤੀ ਕਬੂਲ ਹੈ ਕਿਹੜੀ ਭਗਤੀ ਕਬੂਲ ਨਹੀਂ ਹੈ ਇਹ ਗੁਰਬਾਣੀ ਦੱਸੀ ਹੋਈ ਹੈ ਉਹ ਕਹਿੰਦਾ ਸਿਰਫ ਇੱਕੋ ਭਗਤੀ ਉੱਥੇ ਕਬੂਲ ਹੈ ਬਾਕੀ ਕਬੂਲ ਨਹੀਂ ਕੋਈ ਵੀ ਗੁਰਮਤ ਤੋਂ ਬਿਨਾਂ ਦਾਨ ਉੱਥੇ ਪਹੌਂਦੇ ਕਿਨੂੰ ਮੰਨਿਆ ਹੋਇਆ ਦਾਨ ਕਿਨੂੰ ਮੰਨਿਆ ਹੋਇਆ ਦਰਗਾਹ ਦੇ ਵਿੱਚ ਨਾਮ ਕਿਨੂੰ ਮੰਨਿਆ ਹੋਇਆ ਉਹ ਇਹ ਗੁਰਬਾਣੀ 'ਚ ਸਭ ਕੁਝ ਦੱਸਿਆ ਹੋਇਆ ਜੱਪ ਕਿਹੜਾ ਹੈ ਤੱਪ ਕਿਹੜਾ ਕਬੂਲ ਕੀ ਹੈ ਦਰਗਾਹ 'ਚ ਇੱਥੇ ਜੱਪਥੇ ਨੇ ਅਸੰਖ ਜੱਪਦੇ ਸੱਪ ਪਾ ਅਸੰਖ ਪੂਜਾ ਅਸੰਖ ਤੱਪਤਾ ਲਿਆ ਫਿਰ ਤਾਂ ਦਰਗਾਹ ਕਬੂਲ ਹੋ ਗਿਆ ਹੂੰ ਹੋਰ ਕਿਸੇ ਦਾ ਦੱਸਿਆ ਹੋਇਆ ਕਮਾਲੀ ਦਾ ਐਵੇਂ ਚਲਾ ਗਿਆ ਚੌਥੇ ਲੋਕ ਇਹ ਚੁੱਥੇ ਲੋਕ ਦਾ ਜਨ ਬਾਅਦ ਦੱਸੂਗਾ ਇਹ ਖਰਦਗਾ ਕੀਆ ਬਾਤਾਂ ਨਾਨਕ ਆਖ ਸੁਣਾਵਾ ਹੁਣ ਇਹਦੇ ਬਾਰੇ ਦੱਸੋ ਜੀ ਬ੍ਰਹਮੰਡ ਕੀ ਆ ਖੰਡ ਕੀ ਆ ਤੇ ਪੂਰਨ ਬ੍ਰਹਮ ਕੀ ਤਾਂ ਜੀ ਆਸਮਾਨ ਜਦੋਂ ਤ੍ਰੇ ਤ੍ਰਿਦਕੜ ਕਹਿੰਦੇ ਜਾਂਦਾ ਬ੍ਰਹਮੰਡ ਹੈ ਅੱਛਾ ਜੀ ਦਾ ਬ੍ਰਹਮ ਅੰਡ ਹੈ ਅੰਡੇ ਦੇ ਵਿੱਚੋਂ ਬੱਚਾ ਪੈਦਾ ਹੁੰਦਾ ਅੰਡਾ ਮੈਨੂੰ ਜਦ ਬੱਚਾ ਨਹੀਂ ਪੈਦਾ ਹੁੰਦਾ ਹਾਂ ਜਿਆਨ ਮੈਨੂੰ ਮੜਿਆ ਨਹੀਂ ਆਂਦਾ ਹੈ ਹੂੰ ਹੂੰ ਆਹੋ ਖੜਦਾ ਛੋਟਾ ਜੋ ਆ ਵੀ ਪੂਰਾ ਨਹੀਂ ਹੈ ਹੂੰ ਹੂੰ ਪੂਰਾ ਅੰਡਾ ਜਦੋਂ ਇਹਦਾ ਤਿੰਨ ਲੋਕ ਦਾ ਗਿਆ ਪੂਰਾ ਹੋ ਜਾਣਾ ਤੁਹਾਨੂੰ ਤਾਂ ਇਹ ਪੂਰਨ ਬ੍ਰਹਮੂਣ ਪੂਰਾ ਅੰਡਾ ਬਣ ਉਹ ਤਾਂ ਬਾਅਦ ਇਹ ਪੂਰਨ ਬ੍ਰਹਮ ਹੋਏ ਤੇ ਹੀ ਅੰਡੇ ਦੇ ਵਿੱਚੋਂ ਬੱਚਾ ਨਿਕਲਦਾ ਫੇਰ ਇਹਦਾ ਚਲ ਪੈਣਾ ਹੂੰ ਹੂੰ ਪਹਿਲਾ ਇੱਕ ਹੰਤਾ ਬ੍ਰਹ ਜਿਹੜਾ ਹੈ ਛੋਟ ਬ੍ਰਹਮਤ ਹੈ ਹੂੰ ਅਖੰਡ ਹੋਇਆ ਪਰ ਪੂਰਨ ਬ੍ਰਹਮ ਨਹੀਂ ਹੈ ਪੂਰੇ ਦਾ ਹਿੱਸਾ ਹੈ ਕੁਝ ਹੂੰ ਹੂੰ ਕੁਝ ਜ ਗਿਆਨ ਹੈ ਕੁਝ ਹਿੱਸਾ ਗਿਆਨ ਨਹੀਂ ਹੈ ਜਿਹੜੇ ਸੱਚ ਘਾਟ ਹੈ ਉਹੀ ਉਹੀ ਤਾਂ ਘਾਟ ਹੈ ਕਿਛਤੀ ਹੋਈ ਹੋਈ ਹੈ ਜਿੱਦਾਂ ਸਾਡੇ ਅੰਦਰ ਭੜਮਾ ਉਹੀ ਖਸ਼ਤੀ ਹੋਈ ਹੋਈ ਆ ਉਹ ਭੜਮਾ ਨੂੰ ਹਟਾਉਣਾ ਹੈ ਅਸੀਂ ਅੰਦਰੋਂ ਆਪਣੇ ਦੇਹਰਾ ਦੂਰ ਕਰ ਦੇ। ਠੀਕ ਹੈ ਜੀ। ਆ ਜਾਂ ਕਰ ਦੋ। ਠੀਕ ਹੈ ਜੀ। ਇਹ ਇਹ ਜਿਹੜਾ ਬ੍ਰਹਮ ਐ ਇਹ ਬਾਣੀ ਦੇ ਵਿੱਚ 7 ਵਾਰ ਆਉਂਦਾ ਜੀ ਕਿ ਸੁਖਮਨੀ ਸਾਹਿਬ 'ਚ ਆਉਂਦਾ। ਘਟ ਘਟ ਪੂਰਨ ਪੂਰਨ ਬ੍ਰਹਮ ਪ੍ਰਗਾਸ ਹ ਇੱਕ ਜਗ੍ਹਾ ਆਉਂਦਾ ਅਵਕਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈਏ ਹ ਹਰੇ ਦਿਖਉਂਦਾ ਪੂਰਨ ਬ੍ਰਹਮ ਠੀਕ ਹੈ ਜੀ ਪੂਰਨ ਰਵਿਆ ਮੰਤਨ ਮਹਿ ਅੱਛਾ ਜੀ ਪੂਰਾ ਦੀ ਦ੍ਰਿਸ਼ਟੀ ਘਟਨ ਹੋ ਜਾਂਦੀ ਆ ਮਾਇਆ ਦੀ ਹੀ ਹੋਦੀ ਹੈ ਫਿਰ ਹੂੰ ਮਾਇਆ ਦੀ ਆ ਹੱਡੀ ਹੈ ਉਹ ਜਿਹੜੀ ਬिवेਕਮੁਤੀ ਵਾਲੀ ਦ੍ਰਿਸ਼ਟੀ ਮਾਇਆ ਦੀ ਹੀ ਹੋਦੀ ਹੈ ਇਹਨੂੰ ਬ੍ਰਹਮ ਦਾ ਦੇਨਾ ਮਾਇਆ ਦੀ ਠੀਕ ਹੈ ਉਹ ਲਾਈਟ ਵੀ ਤੇਜ ਹੈ ਮਾਇਆ ਠੀਕ ਹੈ ਜੀ ਇੱਕ ਜਗ੍ਹਾ ਹੁੰਦਾ ਸਮੂਹ ਲੈ ਨਾਨਕ ਪੂਰਨ ਬ੍ਰਹਮ ਪਛਾਤਾ ਆ ਪੂਰਬੰ ਪਛਾਣ ਜਦ ਆਪ ਪੂਰਨ ਬ੍ਰਹਮ ਹੋਇਆ ਜਾਂ ਪਛਾਣਿਆ ਪੂਰਨ ਨੂੰ ਹਾਂ ਜੀ ਕਿ ਉਹ ਪਹਿਲੀ ਲਾਈਨ ਹੈ ਜੀ ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕੀਤੋ ਕਿਨੋ ਸਰਗਣ ਦੇ ਵਿੱਚ ਜਿਹਨੂੰ ਇੱਕ ਕਿਹਾ ਹੈ ਨਾ ਇੱਕ ਹਾਂਜੀ ਉਹ ਪੂਰਨ ਬ੍ਰਹਮ ਹੈ ਉਹ ਪੂਰਨ ਬ੍ਰਹਮ ਹੈ ਸਭ ਹੈ ਅਗਲੀ ਸਟੇਜ ਜਿਹੜੀ ਅਗਲੀ ਸਟੇਜ ਹੈ ਉਹ ਪਾਰਬ੍ਰਹਮ ਦੀ ਹੈ ਇਹ ਤੋਂ ਠੀਕ ਹੈ ਜੀ ਇਹ ਕੋਈ ਤਾਂ ਹੁਣ ਇਹ ਤਾਂ ਜਦੋਂ ਫਿਰ ਆਪਾਂ ਅਰਥ ਕਰਾਂਗੇ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਂਣੋ ਗੋਲਡਰ ਗੋਲਡ ਦੇ ਗੋਲਡ ਕੇ ਥੇਰਾ ਗਿਆ ਫਿਰ ਹੂੰ ਇਹ ਗਿਆ ਬ੍ਰਹਮੰਡ ਨਾਲ ਮਿਲ ਕੇ ਪੂਰਨ ਬ੍ਰਹਮ ਗਿਆ ਹੈ ਜੀ ਉਹ ਉਦੋਂ ਜਦੋਂ ਨਿਹਰਾ ਦੀ ਚਰਨ ਹੋ ਗਿਆ ਉਹ ਕੀ ਸੀ ਨਿਹਰਾ ਦਾ ਕੁਝ ਹੈ ਨਹੀਂ ਸੀ ਨਿਹਰਾ ਤਾਂ ਅਸਲ ਦੇ ਵਿੱਚ ਨਿਹਰੇ ਦਾ ਕੋਈ ਵਜੂਦ ਨਹੀਂ ਹੁੰਦਾ ਠੀਕ ਹੈ ਜੀ ਲਾਈਟ ਦੀ ਗੈਰ ਹਾਜ਼ਰੀ ਦਾ ਨਿਹਰਾ ਹੈ ਲਾਈਟ ਹੈ ਦੀ ਨਿਹਰਾ ਸੀਗਾ ਲਾਈਟ ਆ ਗਈ ਦੇਰਾ ਹਟ ਗਿਆ ਪਰੇ ਠੀਕ ਹੈ ਜੀ ਇਹਦਾ ਤਾਂ ਕੁਝ ਵੀ ਨਹੀਂ ਸੀਗਾ ਉਹ ਤਾਂ ਉਹਦੀ ਗੈਰ ਹਾਜ਼ਰੀ ਦਾ ਹਨੇਰਾ ਆਪਣੀ ਆ ਗਈ ਜਾਗ ਪਿਆ ਦੇਰਾ ਗਿਆ ਜਦੋਂ ਆਪਾਂ ਆ ਬ੍ਰਹਮੰਡ ਦੀ ਸਥਿਤੀ ਚ ਖੰਡਤ ਦੋ ਜਗ੍ਹਾ ਅਧੂਰਾ ਹੈ ਉਹਦਾ ਬਣਾ ਪੁੱਛੇ ਤੇ ਖੰਡ ਬ੍ਰਹਮਾ ਅੰਡ ਹੂੰ ਬ੍ਰਹਮਾ ਅੰਡ ਰੂਪ ਕਹਿ ਟਰਕ ਨੂੰ ਘਟ ਆ ਜੋ ਉਹਨਾਂ ਪ੍ਰਭ ਤੋਂ ਘਟ ਨੂੰ ਬ੍ਰਹਮੰਡ ਕਹਿੰਦੇ ਸੀ ਅੱਛਾ ਜੀ ਫਿਰ ਇੱਥੇ ਮਤਲਬ ਚਾਰ ਅੱਖਰਾਂ ਸਮਝਣਾ ਬੜਾ ਔਖਾ ਚਾਰ ਅੱਖਰ ਜਿਹੜੇ ਲਿਖੇ ਆ ਉਹ ਬ੍ਰਹਮੰਡ ਲਿਖਿਆ ਫਿਰ ਖੰਡ ਫਿਰ ਪੂਰਨ ਬ੍ਰਹਮ ਬ੍ਰਹਮਾ ਜਿਹੜਾ ਲਫ਼ਜ਼ ਪਹਿਲਾਂ ਬ੍ਰਹਮ ਬ੍ਰਹਮਾ ਤਾਂ ਆਲੇ ਨਾ ਬ੍ਰਹਮਾ ਗੁਣ ਉੱਚਾ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੇ ਹੁਣ ਫਿਰਮਾ ਜਿਹੜਾ ਹੈ ਬ੍ਰਹਮ ਐ ਇੱਕ ਇੱਕ ਬ੍ਰਹਮ ਇੱਕ ਬ੍ਰਹਮ ਸਰੀਰ ਨਾਲ ਜੁੜਿਆ ਹੋਇਆ ਹੈ ਇਹਦਾ ਧਿਆਨ ਇਹਦੇ ਧਿਆਨ ਨਾਲ ਉਹ ਬ੍ਰਹਮ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਹੈ ਥਾ ਠੀਕ ਉਹਦਾ ਨ符ਮਾਲ ਨਾਲ ਬ੍ਰਹਮ ਦੇ ਉਹ ਬ੍ਰਹਮ ਭੁਖਤਾ ਹਾਂਜੀ ਹਾਂ ਇਹ ਤਾਂ ਫਰਕ ਹੈ ਹਾਂਜੀ ਬ੍ਰਹਮ ਜਿਹੜਾ ਹੈ ਸਰੀਰ ਤੇਰੇ ਛੱਡ ਕੇ ਬ੍ਰਹਮ ਦੇ ਨਾਲ ਜੁੜ ਜਾਂਦਾ ਹੈ ਜਿਆਦਾ ਧਾਰ ਜੋੜਦਾ ਫਿਰ ਪੂਰਨ ਬ੍ਰਹਮ ਬਣਦਾ ਹੈ ਅੱਛਾ ਜੀ ਬ੍ਰਹਮਾ ਕਦੋਂ ਆਹੇ ਇਹ ਉਹ ਨਾਲ ਜਦੋਂ ਨਾਲ ਜਰ ਭਾਂ ਜੋੜਦਾ ਇਹ ਨਹੀਂ ਜਿੱਦਾਂ ਦਾ ਗਿਆਨ ਨਹੀਂ ਹੋ ਲੋਕ ਸਟੇਜ ਤੇ ਹੈ ਜੀ ਫਿਰ ਜੇ ਨਾਲ ਜਰ ਗਿਆਨ ਘਟਾ ਅੱਛਾ ਜਦੋਂ ਤੱਕ ਗਿਆਨ ਘਟਾ ਫਿਰ ਉਸ ਬ੍ਰਹਮਾ ਤੋਂ ਬਾਅਦ ਪੂਰਨ ਬ੍ਰਹਮ ਪੂਰਨ ਬ੍ਰਹਮ ਫੇਰ ਫਿਰ ਇਹਦਾ ਗੁਣ ਨਿਰਗੁਣ ਸਮਝਾਣੀ ਹੋ ਜਾਏਗਾ। ਅਨਗੁਣ ਉਹ ਹੋਰ ਡੇਰ ਕੋਣ ਜਿੱਤੇ ਠੀਕ ਆਂ ਡੇਰਾ ਸੀ ਉਹ ਉਹ ਜੀ। ਹਾਂ ਜੀ ਨੇ ਆਪਣੇ ਆਪ ਨੂੰ ਜੋ ਇੱਕੋ ਹੀ ਠੀਕ ਹੈ ਜੀ। ਹਾਂ ਜਪ ਕਲ ਸੁਜਸ ਨਾਨਕ ਗੁਰ ਸ਼ਹਜ ਜੋਗ ਜਿਨ ਮਾਨਿਓ ਇੱਥੇ ਹੁਣ ਜਪ ਅਖਰ ਵਰਤਦਾ ਉਹਨਾਂ ਨੇ ਪਹਿਲਾਂ ਉਹ ਕਾਬ ਵਰਤਦੇ ਸੀ ਕਵੀ ਵਰਤਦੇ ਹੁਣ ਜਪ ਕਾਇਤਾ ਹਾਂ ਜਪਦਾ ਮਤਲਬ ਇੱਥੇ ਹੁਣ ਜਪਣਾ ਹੈ ਹੀ ਦੀ ਜਪ ਕਾਲ ਸੁਜਾਸ ਸਾਰਾ ਜਸ ਨੂੰ ਜਾਣ ਸਮਝ ਹੂੰ ਜਪਦਾ ਅਸਦਾ ਇੱਕ ਜਿਹੜਾ ਜਪ ਲਫ਼ਜ਼ ਹੈ ਗੁਰਬਾਣੀ ਕੇ ਅਧਾਰ ਤੇ ਸਮਝਣਾ ਚਾਹਣ ਲੋ ਹੂੰ ਕਿਉਂਕਿ ਗਿਆਨ ਹੈ ਸਾਡਾ ਸਾਡਾ ਤਰਮ ਗਿਆਨ ਹੈ ਸਾਬ ਜੀ ਨੇ ਵੀ ਯਾਦ ਰੱਖ ਕੇ ਆ ਇੱਥੇ ਵਾ ਇਹ ਆਦ ਤੱਕ ਹੈ ਤੇ ਸਿਰ ਲੁਕਦਾ ਹੈ ਆਰ ਨਹੀਂ ਆਇਆ ਹੂੰ ਹੂੰ ਜਾਣਣਾ ਲਫ਼ਜ਼ ਜਪਵਾ ਨਾ ਜਾਣਣਾ ਦਾਦਾ ਪਰ ਮੈਂ ਕਹਿੰਦਾ ਵੀ ਉਹਨਾਂ ਨੇ ਵੀ ਮਤਲਬ ਇੱਥੇ ਉਹਨਾਂ ਨੇ ਵੀ ਸਮਝ ਲਿਆ ਵੀ ਇਹਦਾ ਅਰਥ ਕੁਝ ਹੋਰ ਹੈ ਜਪ ਕਲ ਸੁਜਸ ਨਾਨਕ ਗੁਰੂ ਹਾਂ ਜੀ ਵੀ ਕੱਲ ਕਰੀ ਜਗਾ ਸਾਹਿਬ ਹੈ ਹਰ ਜਗ੍ਹਾ ਜਪੜੋ ਨਹੀਂ ਕਰਦਾ ਹਾਂ ਹਾਂ ਜੀ ਹਾਂ ਉੱਥੇ ਜਪੜਦਾ ਪਾਣੀ ਕਰਦਾ ਠੀਕ ਹੈ ਹਾਂ ਜੀ ਦੱਸੋ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਨਮਾਨਿਓ ਵੀ ਤੂੰ ਉਹ ਗੁਣਾਂ ਉਸ ਨੂੰ ਤੂੰ ਵੀ ਸੱਜ ਲੈ ਆੰਗਰੇਜ਼ ਜਿਹੜਾ ਸੁਲਤਾਨ ਕਾਲਾ ਜਾਸੂ ਉਹਨੂੰ ਤੂੰ ਵੀ ਸਮਝੀ ਜਾਣ ਲੈ ਜਾਣਦੇ ਤੇ ਬਿਨਾ ਕੁਝ ਜਾਣਦੇ ਤੇ ਬਿਨਾ ਬੰਦੀ ਨਹੀਂ ਠੀਕ ਹੈ ਜੀ ਇਹ ਜਾਣ ਲੈ ਤੂੰ ਵੀ ਉਹਨੂੰ ਜਾਫੋ ਉਸ ਜਾਸੂ ਨੂੰ ਤੂੰ ਵੀ ਜਾਣ ਸਮਝ ਸਮਝ ਕੇ ਹੀ ਸਮਝਾ ਸਕੇਂਗਾ ਹੂੰ ਤੇ ਬਿਨਾ ਤੂੰ ਵੀ ਪੂਰ ਪਰਮੇਸ਼ਵਰਤਾ ਜਾ ਸਕਦਾ ਕੋਲ ਦਾਸ ਦਾ ਹੋ ਕੇ ਬਣਾ ਤੇਰਾ ਜਨ ਪਦਾਰਥ ਲਈ ਮਿਲਣਾ ਉਹਦੇ ਨਾਲ ਬਾਣੀ ਦਾ ਗੁਰਬਾਹ ਤੁਰਕੀ ਬਾਣੀ ਦਾ ਸੰਪਰਕ ਨਹੀਂ ਹੋਣਾ ਗੁਰਬਾਣੀ ਨਹੀਂ ਉਚਾਰਨ ਹੋਣੀ ਕਹਤੇ ਮੇਰੇ ਗੋਬਿੰਦ ਕੀ ਬਾਣੀ ਸਾਰੀ ਗੁਰਬਾਣੀ ਤੋਂ ਪਹਿਲਾਂ ਜਪਾਇਆ ਹੋਇਆ ਹੈ ਪਰ ਪੱਪੇ ਨੂੰ ਉਕੜਾਇਆ ਹੋਇਆ ਹੈ ਵੀ ਇਹ ਨਾਲ ਇਹ ਦੋਵੇਂ ਅਸੀਂ ਦੇਖ ਲੈਣਾ ਸੀ ਵੀ ਜਿਹੜਾ ਸਾਰੀ ਜਿਹੜੀ ਗੁਰਬਾਣੀਆਂ ਜਪਣ ਦਾ ਵਿਸ਼ਾ ਇਹ ਠੀਕ ਹੋ ਜੀ ਇਹ ਜਾ ਦਾ ਜਪਣ ਦਾ ਵਿਸ਼ਾ ਸਮਝਣ ਦਾ ਵਿਸ਼ਾ ਹੈ ਗੁਰਬਾਣੀ ਜਾਪ ਉੱਤੇ ਲਿਖਣ ਦਾ ਮਤਲਬ ਇਹ ਠੀਕ ਹੈ ਜੀ ਅਸੀਂ ਇਹਨਾਂ ਦਾ ਅੱਲਾ ਵਾਜ਼ਿਹ ਔਰ ਜਾਪ ਇੱਕੋ ਹੀ ਆ ਸਾਡਾ ਗੁਰਬਾਣੀ ਸਭੇ ਦਾ ਜਪਾ ਕਾਤਾ ਗੁਰ ਕੀ ਮੱਤ ਤੋਂ ਲਿਓ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰ ਕੀ ਮੱਤ ਲੈਣੀ ਆਸੀ ਇਹ ਭਗਤੀ ਤੋਂ ਬਿਨਾ ਹੋਰ ਬੜੇ ਬੜੇ ਸਿਆਣੇ ਹੋਰ ਹੋਰ ਭਗਤੀ ਦੇ ਅਰਥ ਕਰਕੇ ਅਸੀਂ ਗੁਰ ਗੁਰਬਾਣੀ ਜੋਰ ਹੋਰ ਰਾਤ ਇਹਦੇ ਨਾਲ ਜੋੜਤਾ ਹਾਂਜੀ ਸਤਾਵੜ ਵਿੱਚ ਗੁਣ ਗੱਲ ਆਪਣੀ ਕਰੀ ਜਾਂਦਾ ਹੈ ਨਾ ਹੋਰ ਰੱਖ ਲੈਂਦੇ ਨੇ ਠੀਕ ਹੈ ਜੀ ਹਾਂਜੀ ਗੁਣ ਗਾਵੈ ਨਵਨਾਥ ਧੰ ਗੁਰ ਸਾਚ ਸਮਾਇਓ ਗੁਰੂ ਨਾਨਕ ਨਾਥ ਅਜੇ ਨਾਥ ਨੇ ਜੋਗੀ ਦੇ ਹਾਂਜੀ ਜੋਗੀਆਂ ਦੇ ਵਿੱਚੋਂ 9 ਨਾਥ ਫੜਦੇ ਸੀ ਅੱਛਾ ਜੀ ਉਹ ਮੁਸਲਮਾਨਾਂ ਨਾਲ ਇਹਨਾਂ ਦਾ ਹੋ ਗਿਆ ਸੀ ਕੰਪਰੋਮਾਈਜ਼ ਸੀਗੇ ਰਹਿ ਗਏ ਇਹ ਜੋਗੀ ਪਰ ਲੈ ਗਏ ਸਿੱਧੇ 75 ਲੈ ਗਏ ਸੀਗੇ ਇਹ ਅੱਛਾ 84 ਤੋਂ 9 ਰਹਿ ਗਏ ਨੋ ਨਾ ਹੋ ਗਈ ਸੀ ਇਹ ਕਹਿੰਦੇ ਬਾਹਲਾ ਫੇਰ ਰੱਖਦੇ ਨਹੀਂ ਅਸੀਂ ਜੋਗੀ ਵਾਲਾ ਅੰਦਰ ਜਿਹੜਾ ਹੈਗਾ ਉਧਰੋਂ ਅਸੀਂ ਜਿਹੜਾ ਵਿਚਾਰਤਾਰਾ ਅਸਲਾਮੁਅਲੈਕੂਮ ਕੀ ਸਾਡੀ ਨਾਥਾ ਨੇ ਸੀਗਾ ਮੁਸਲਮਾਨਾਂ ਨੇ ਕਿਹਾ ਜੀ ਆ ਤਾਂ ਬਾਹਲਾ ਫੇਰ ਮੁਸਲਮਾਨਾਂ ਕਰ ਲੋ ਤੁਸੀਂ ਆਪਣੇ ਆਪਣਾ ਜਿਹੜਾ ਜਾਪ ਆਪਣਾ ਵਾਲਾ ਕਰੀ ਜਾਓ ਯਾ ਫਿਰ ਬਾਹਰਲਾ ਪੇਖ ਆਪਣਾ ਰਖ ਲੋ ਵਿਚਾਰਤਾ ਦਾ ਸਾਡੇ ਵਾਲੀ ਗੱਲ Quran ਵਾਲੀ ਤੋ ਉਸ ਵੇਲੇ ਪੰਡਤਾਂ ਨੇ ਵੀ ਸੀ ਬਾਹਰ ਕਦੇ ਪੜਦੇ ਤੇ ਅੰਦਰ ਬਹਿ ਕੇ ਲੋਕੇ ਪੂਜਾ ਕਰਦੇ ਤੇ ਅੰਦਰ ਪੂਜਾ ਪੜੇ ਕਿਤੇ ਮੂ ਸਜਬਤਰ ਲਿਖੀ ਹੋਈ ਆ ਉੱਥੇ ਪਾਸਾ ਦੀ ਵਾਰ ਜੇਹੀ ਗੱਲ ਕੀ ਹੋਈ ਹੈ ਠੀਕ ਹੈ ਕਿਉਂਕਿ ਯਾਰ ਪੰਡਤ ਦੋਏ ਕਬ ਲਾਗੇ ਸੀ ਕਦ ਪ੍ਰੈਸ਼ਰ ਚ ਆਏ ਹੋਏ ਕੋ ਗੁਰ ਤੇ ਹੂੰ ਹਾਂ ਗੁਰ ਕਾਵਨ ਅਬ ਨਾਥ ਧੰਨ ਕਹਿੰਦੇ ਨੇ ਧੰਨ ਵਰ ਗੁਰ ਨਾਨਕਾ ਜਿਹੜਾ ਸੱਚ ਸੁਭਾ ਤੋਂ ਪ੍ਰਭਾਵਤ ਨੇ ਨਾਥ ਪ੍ਰਭਾਵਤ ਨੇ ਕਿਉਂ ਨਾਦ ਦੇ ਉੱਪਰ ਮਾ ਹੁੰਦਾਂ ਹੂੰ ਹੂੰ ਕੋਈ ਨਾਥਾਂ ਦੇ ਦੋ ਬੱਤ ਛੱਡ ਕੇ ਸਨਾਮ ਲੈ ਲਿਆ ਸੀ ਹੂੰ ਵਿਚਾਰ ਤਾਂ ਰਾਏ ਸੁਨਾਮਣੀ ਸੀ ਜਿਹੜੀ ਗੱਲ ਕਹਿ ਆ ਉਹ ਘੱਟ ਮੇਕਸ਼ਰ ਜੀ ਕਿਉਂਕਿ ਹਿੰਦੂਵਾਦ ਨਾਲ ਗਈ ਸੀ ਇੱਕ ਖੁੱਲ ਗਈ ਸੀ ਮੇਰਾ ਹੀ ਉਹ ਤਾਂ ਪੱਥਰ ਪੂਜthਾਈ ਨਾ ਪੂਜਤੀ ਪੂਜਨ ਦਾ ਬੁਲਦਾ ਹੀ ਦਿੱਤੀ ਹੂੰ ਹੂੰ ਕਿ ਜਨਮ ਲੈ ਲਿਆ ਉਹ ਉਹ ਬੁਲਦਾ ਦੀ ਹੈ ਇਸ ਕਰਕੇ ਨਾਨਦ ਕਰਨੇ ਨਿਆਕਾਰ ਦੀ ਗੱਲ ਕੀਤੀ ਹੈ ਉਹ ਨਾਲ ਨੂੰ ਆਸ਼ਾਸ਼ ਕਰਦੇ ਤੇ ਬਾਬੇ ਉਹਨਾਂ ਦੇ ਵਿਚਾਰ ਸਾਰਾ ਇਹਦੀ ਨਹੀਂ ਹੈ ਹੂੰ ਕੋਲ ਇਹਦੀ ਮਤਲਬ ਆ ਉਹਨਾਂ ਨੂੰ ਇੰਨਾ ਗਿਆਨ ਨਹੀਂ ਮਿਲਿਆ ਹੋਇਆ ਉਹਨਾਂ ਦੀ ਜਿਹੜੀ ਗੱਤ ਆ ਉਹ ਜੇ ਗਿਆਨ ਪੂਰਾ ਨਹੀਂ ਹੈ ਨਾ ਕਰਦਾ ਤੇ ਗੱਲ ਠੀਕ ਆ ਪੁਰਾਣ ਵਿੱਚ ਗਿਆਨ ਕਰਦੇ ਨੇ ਜੋਗੀ ਨਹੀਂ ਕਰਦੇ ਦੇਖੋ ਬਹੁਤ ਭਰੀ ਗੱਲ ਹੈ ਅੱਛਾ ਗੱਲ ਕਰਦੇ ਨੇ ਉਹਦੀ ਉਹ ਜੋਗੀ ਸ਼ਰਤ ਤੇ ਹਾਂ ਨਾਥਾਂ ਦੀ ਗੱਲ ਹੋ ਰਹੀ ਉਹਨਾਂ ਨਾਲ ਦੀ ਗੱਲ ਹੋ ਰਹੀ ਹੈ ਉਹਨਾਂ ਦੀ ਵਿਚਾਰਦਾਰ ਹਿੰਦੂ ਵਾਲੀ ਹੈ ਦੀ ਹਾਂ ਪੰਨ ਗੁਰਸਿ ਮਾਇਓ ਤਾਂ ਉਹਦੇ ਸਾਸ ਆਇਓ ਗੋਲਨਾਮ ਕਾ ਧਰਮ ਨੇ ਸਬਤ ਇਸੇ ਕਰਕੇ ਇਸੇ ਕਰਕੇ ਮੁਸਲਮਾਨਾਂ ਨੇ ਪੀਰ ਬਣੇ ਇਨਾਦ ਗੁਰੂ ਐਵੇਂ ਨਹੀਂ ਬਣਿਆ ਅੱਛਾ ਨਾਨਕ ਗੁਰੂ ਪੀਰ ਬਣਨ ਲੱਗੇ ਮੁਸਲਮਾਨ ਐਵੇਂ ਥੋੜੀ ਬਣਨ ਲੱਗੇ ਸੀ ਨਰਕ ਤੋਂ ਪ੍ਰਭਾਵਤ ਨੇ ਨਾਥ ਸਾਰੇ ਨਰਕ ਤੋਂ ਪ੍ਰਭਾਵਤ ਹੈ ਜਿਹੜੇ ਬੜੇ ਬੜੇ ਮੁਸਲਮਾਨ ਨੇ ਹਾਂ ਜੀ ਵਿਦਵਾਨ ਕਾਲ ਮੁਸਲਮਾਨ ਸੀ ਸਾਰੇ ਨਰਕ ਤੋਂ ਪ੍ਰਭਾਵਤ ਨੇ ਗੁਰੂ ਘਰ ਤੋਂ ਪ੍ਰਭਾਵਤ ਨੇ ਹੂੰ ਹੂੰ ਯਾ ਮੇਰ ਦਾ ਮੁਸਲਮਾਨਾਂ ਦੇ ਵਿੱਚ ਜਿਹੜੇ ਸਹਿਮਤ ਨੇ हां जी मा, मादा अंत गुण रवे जैन चक्रवे कहयो मंदाता मंदाता गुण रवे हां जी वो दादा कराजे अच्छा जी वो भी ਹਾਂਜੀ ਜੇ ਕਹਿੰਦੇ ਚੱਕਰਵਰਤੀ ਹਾਂ ਕਹਾਇਆ ਚੱਕਰਵਰਤੀ ਚੱਕਰਵਰਤੀ ਦੇ ਜਾਵੇ ਠੀਕ ਹੈ ਜੀ ਚੱਕਰਵਰਤੀ ਕਹਾਇਆ ਇਹੋ ਹੂੰ ਚਾਰੇ ਜਗੀਰਾਂ ਖੁੱਲੀਆਂ ਨੇ ਗਾਣਾ ਆਜ਼ਾਦ ਹੈ ਹੂੰ ਆ ਚੱਕਰਵਰਤੀ ਰਾਜ ਰਾਜੇ ਕਿਸੇ ਨਾਲ ਬੈਰ ਵਿਰੋਧ ਨਹੀਂ ਉਹਨਾਂ ਦਾ ਹੁੰਦਾ ਹਾਂ ਹਾਂ ਨੂੰ ਸਮਝਾ ਕੇ ਸਾਰਿਆਂ ਨਾਲ ਸੁਲ੍ਹਾ ਕਰਦੇ ਨੇ ਆਪਸ ਵਿੱਚ ਹੀ ਸਾਨੂੰ ਦੀ ਸੁਲ੍ਹਾ ਕਰਾਉਂਦੇ ਨੇ ਰਾਜੇ ਨੂੰ ਕਹਿੰਦੇ ਬੁਲਕੇ ਰਹੋ ਇੱਕ ਦੂਏ ਨਾਲ ਈਰਖਾ ਨਾ ਕਰੋ ਪਬਲਿਕ ਦੀ ਸੇਵਾ ਕਰੋ ਆਪਾਂ ਨੂੰ ਟਾਈਮ ਮਿਲਿਆ ਆਪਾਂ ਅੱਗੇ ਜਵਾਬ ਦੇ ਆਪੇ ਚੱਕਰ ਵੇ ਕਾਹੇ ਉਹ ਕਿਸੇ ਦਾ ਦੁਸ਼ਮਣ ਨਹੀਂ ਉਹਦਾ ਕੋਈ ਦੁਸ਼ਮਣ ਨਹੀਂ ਆਪੇ ਚੱਕਰ ਵਾਇਆ ਠੀਕ ਹੈ ਮਾੜਾ ਚੱਕਰ ਉਹ ਤਾਂ ਕਹਾਇਆ ਗੁਣਾ ਕਰਕੇ ਐ ਨਹੀਂ ਵੀ ਉਹ ਜਾ ਕੇ ਲੋਕਾਂ ਨਾਲ ਲੜਿਆ ਹੈ ਤੇ ਆਪਣੇ ਥੱਲੇ ਕੀਤਾ ਜੀ ਆ ਨਾ ਨਾ ਨਾ ਠੀਕ ਲੜਾਈ ਤਾਂ ਖੜਕ ਕੀਤੀ ਹੈ ਗਲਾਈ ਸਥਾਨ ਉਹ ਲੜਾਈ ਛੱਡਤੀ ਠੀਕ ਹੈ ਜੀ ਹਾਂ ਜੀ ਅੱਗੇ ਤਾਂ ਕੋਈ ਜਿੱਤਦਾ ਸਥਾਨ ਗੁਣ ਗਾਵੇ ਸਪਤ ਪਾਤਾਲ ਬਸੰਤੋ ਕੁਲਗਉਂਦਾ ਬਲਣਾ ਬਲਿਰਾ ਰਾਜ ਦੀ ਗੱਲ ਚੱਲਦੀ ਹੈ ਇਹਨਾਂ ਦੇ ਵਿੱਚ ਅੱਛਾ ਜੀ ਉਹ ਬਲਣਾ ਆ ਜਿਆਦਾ ਹੈ ਕੁਲਗਉਂਦਾ ਜਿਆਦਾ ਦਾ ਬੁੱਧਵਾਲ ਪੂਰਾ ਹੋ ਜਾਂਦਾ ਹੈ ਤਾਂ ਬਲਲਾ ਜਾਏ ਇਹਨਾਂ ਗਿਆ ਰਾਜਾ ਬਲਲਾ ਹੋ ਗਿਆ ਉਹਦੇ ਅੰਦਰੇ ਬਸਦੇ ਪਤਾਲ ਜਾ ਕੇ ਬਾਹਰ ਕਿੱਥੇ ਬਸਦੇ ਹੂੰ ਹੂੰ ਗੁਰਗਾ ਚਾਲਣ ਨੇ ਜਿੱਥੇ ਬਸਣਾ ਉਹਰ ਕੁੜੀ ਜਿੱਦੀ ਵਸਦਾ ਹਿਰਦੇ 'ਚ ਵਸਦਾ ਇਹ ਪਤਾ ਨਹੀਂ ਪਤਾਲੇ ਨੂੰ ਕੀ ਆ ਕਿ ਉਹ ਸਬਤ ਪਤਾਲੇ ਤੋਂ ਸੰਤੋਸ਼ੀ ਹੈ ਜੀ ਉਹ ਸਬਤ ਸੰਤੋਸ਼ ਪਤਾਲੇ ਹੁੰਦਾ ਹੈ ਗਿਆਨ ਅੰਦਰਿਆਂ ਦੇ ਥੱਲੇ ਪਤਾਲੀ ਹੈ ਹੂੰ ਹੂੰ ਗਿਆਨ ਅੰਦਰਿਆਂ ਨੂੰ ਸਿਰ ਨੂੰ ਆਪਾਂ ਪਰਬਤ ਮੰਨ ਲੀਏ ਇਹਦੇ ਥੱਲੇ ਦਾ ਇਸਤਾ ਜਿਹੜਾ ਹਰ ਦਾ ਪਤਾਨੇ ਹੋ ਗਿਆ ਸੱਤ ਪਤਾਲ ਹੀ ਹੈ ਔਰ ਹੋਰ ਸਭਤ ਪਤਾਲ ਜਿਹੜਾ ਹਾਂ ਠੀਕ ਹੈ ਜੀ ਉਹ ਸੱਤ ਸ੍ਰਿਧਰ ਪਤਾਲੇ ਆ ਠੀਕ ਹੈ ਜੀ ਬਾਜੋਂ ਕਿੱਲੇ ਵਾਲਾ ਪੈ ਗਿਆ ਇਹਨੂੰ ਪਤਾ ਨਹੀਂ ਲਫ਼ਜ਼ਾਂ ਤੇ ਸਮਝਣ ਦਾ ਕਿੱਲੇ ਵਾਲਾ ਹੋ ਗੱਲ ਬਹੁਤੀ ਲੰਬੀ ਜੋੜੀ ਦੀ ਹੈ ਠੀਕ ਹੈ ਜੀ ਵਿਦਵਾਨਾਂ ਦਾ ਪਾਇਆ ਸਾਦਾ ਹਾਂਜੀ ਹਾਂਜੀ ਭਰਤਿ ਗੁਣ ਸਦਾ ਗੁਰ ਸੰਗ ਰਹੰਤੋ ਭਰਤਿ ਗੁਣ ਉਚਰੇ ਭਰਤਿ ਰਾਜਾ ਹੋਇ ਕੋਈ ਵੀ ਗੋਲੂ ਹੀ ਗਾਏ ਗੁਰ ਉਚਰੇ ਸਦਾ ਗੁਰ ਰਹੰਤੋ ਰਹੰਤੋ ਗੁਰ ਸੰਗ ਰਹੰਤੋ ਸਦਾ ਇੱਕ ਮਨੇ ਕਿਛਤ ਮਿਲਿਆ ਰਹੰਦਾ گور ਕੌਣ ਗੁਰੋ ਦਾ ਬਨ ਨਾ ਗੁਰੋ ਦਾ ਆਪਣੇ ਚੇਤਨ ਨਾਲ ਆਪਣੇ ਬੂਲ ਨਾਲ ਮਿਲਿਆ ਰਹਿੰਦਾ ਭਰਤਰੀ ਦਾ ਹੂੰ ਹੂੰ ਫਿਰ ਇਹ ਕਰਕੇ ਆਪਣੇ ਬੂਲ ਨਾਲ ਮਿਲਿਆ ਰਹਿੰਦਾ ਸੰਗਤ ਕਰਦਾ ਜੋਗੀ ਦਾ ਕਾਫੀ ਜ਼ਿਕਰ ਪਹਿਲਾਂ ਵੀ ਆਉਂਦਾ ਹੈ ਕਾਫੀ ਉਹ ਜੁੱਤ ਜੋਗੀ ਸੀ ਜੀ ਇਹ ਰਾਜਾ ਸੀ ਜੋਗੀ ਬਣਿਆ ਰੋਵੇ ਰਾਜੇ ਜੋਗੀ ਰੋਵੇ ਰਾਜੇ ਕੰਨ ਪੜਾਏ ਵਾਲਾ ਫੇ ਔਰ ਰਾਜੇ ਦਾ ਹੋਰ ਕੱਲ ਪੜਾ ਕੇ ਵੀ ਰੋਂਦੇ ਤੇ ਪਰ ਪਰਥਵੀ ਵੀ ਰੋਇਆ ਅੱਛਾ ਜੀ ਪਰਥਵੀ ਨੂੰ ਕੁਝ ਮਿਲ ਗਿਆ ਪਹਿਲਾਂ ਹੀ ਅਸਲ ਮਿਲਿਆ ਗੋਲਮਾ ਤਾਲੂ ਕੀਤੀ ਫਿਰ ਠੀਕ ਹੈ ਜੀ ਹਾਂ ਠੀਕ ਹੈ ਚਲੋ ਦੂਜੇ ਸੰਭਾ ਠੀਕ ਹੈ ਜੀ ਹਾਂ ਗੁਰੂ ਨਾਨਕ ਜਸ ਗਾਇਓ ਦੁਰਵਾ ਹੂੰ ਦੁਰਵਾ ਸਾਰੀ ਜਿਹੜਾ ਦੁਰਵਾ ਦਾ ਦੁਰਵਾ ਹੂੰ ਜਿਹੜਾ ਪਹਿਲਾਂ ਦੁਰਮਰ ਦਾ ਧਾਰਨੀ ਸੀ ਉਹ ਦੁਰਵਾ ਸੀ ਦੂਰੇ ਦੂਰ ਜਾਂਦਾ ਸੀ ਅੱਛਾ ਜੀ ਜੀ ਪਹਿਲਾਂ ਦੂਰ ਦੂਰ ਲੱਗੇ ਜਾਂਦੀ ਸੀ ਉਹ ਪਹਿਲਾਂ ਦੂਰਵਾ ਸੀ ਅੱਛਾ ਪਹਿਲਾਂ ਦੂਰਵਾ ਪਰੇ ਤੋਂ ਪਰੇ ਜੇਲਾ ਮਤਲਬ ਹੈ ਫਿਰ ਪਰੋ ਪਰੇ ਤੋਂ ਪਰੇ ਗਿਆਨ ਵਾਲਾ ਹੋ ਗਿਆ ਹੰ ਹੰ ਅੰਗਰੇ ਪਹਿਲਾਂ ਤਾਂ ਹਾਂ ਅੰਗਰੇ ਪੁਰੂਰ ਅੰਗਰੇ ਹੈ ਅੰਗਰੇ ਨਾਲ ਲੈ ਕੇ ਅੱਛਾ ਜੀ ਇੱਕ ਵਾਰੀ ਹਾਂ ਉਹਦਾ ਅੰਗ ਹੋਇਆ ਠੀਕ ਹੈ ਜੀ ਠੀਕ ਹੈ ਵੀ ਜਿਹੜਾ ਸੀਗਾ ਹਾਂ ਉਹ ਆਪਣੇ ਗੁਰਦੇਵ ਨਾਲ ਰਹਿ ਕੇ ਇੱਕ ਮਨਿਕ ਚਿਤ ਹੋ ਕੇ ਪਰੇ ਤੋਂ ਪਰੇ ਨੇ 9 ਵਜੇ ਦਾ ਹੀ ਰੱਖੇ ਨੇ ਆਪਣੇ ਹਾਂ ਹਾਂ ਕਿਸੇ ਨੇ ਆਪਣਾ ਦੂਰਵਾ ਨਾ ਰਖ ਲਿਆ ਇਹਦਾ ਮੈਂ ਦੂਰਵਾਸੀ ਹੂੰ ਹੋ ਹੁਣ ਵੀ ਦੂਰਵਾ ਤਾਂ ਹੁਣ ਮੇਰੀ ਦੂਰਦ੍ਰਿਸ਼ਟੀ ਹੈ ਜਿਹੜੇ ਦ੍ਰਿਸ਼ਟੀ ਹੈ ਪਹਿਲਾਂ ਦੂਰ ਜਾਂਦਾ ਸੀ ਹੂੰ ਉੱਠਾ ਚੱਲਦਾ ਸੀ ਹੂੰ ਉਹ ਦੂਰ ਦੇਖਦੀ ਆ ਵੀ ਇੱਧਰ ਕੁਝ ਨਹੀਂ ਐ ਇੱਧਰੇ ਆਜੋ ਕੁਝ ਐ ਜੀ ਹਾਂ ਜੀ ਗੁਰੂ ਕਬ ਕਰਲ ਸੁ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਜਿਹੜਾ ਜਸ ਗੁਰੂ ਨਾਨਕ ਦੇ ਜਾਇਆ ਸਾਰੇ ਜੇ ਉਹ ਉਹ ਜਸ ਐਸਾ ਹੈ ਹੂੰ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਜਸ ਹੈ ਉਹ ਹੂੰ ਹੂੰ ਸਾਰੇ ਦੇ ਅੰਦਰ ਉਹ ਪ੍ਰਗਟ ਹੋ ਸਕਦਾ ਹੈ ਹੂੰ ਹੂੰ ਘਟ ਸਹਿਜ ਸਮਾਇਓ ਦੀ ਲੋੜ ਹੈ ਹੂੰ ਤੇ ਲੋੜ ਹੈ ਜੇ ਮਨ ਤੇ ਕਿਤੇ ਅੰਦਰੋਂ ਸਾਰਿਆਂ ਦੀ ਪ੍ਰਾਪਤ ਹੋ ਜਾਂਦਾ ਅਸਲ ਤੇ ਸਾਰਿਆਂ ਦੇ ਅੰਦਰ ਹੀ ਜਸ ਹੋਗਾ ਹੂੰ ਤਾਂ ਹੀ ਅਸੀਂ ਕਹਿੰਦੇ ਵਾਹ ਵਾਹ ਕਮਾਲ ਕਰਤੀ ਇਹਨੇ ਗੱਲ ਕਹੀ ਕਿਉਂ ਸਾਡੇ ਅੰਦਰ ਵੀ ਉਹ ਗੱਲ ਹੈ ਗੱਲਾਂ ਸਾਡੀ ਗੱਲ ਨੂੰ ਗੱਲ ਟੈਲੀ ਕਰ ਗਈ ਸਾਡੀ ਇੱਛਾ ਤੋਂ ਟੈਲੀ ਕਰ ਗਈ ਹੂੰ ਕਹਿੰਦਾ ਗੱਲ ਉਹੀ ਕਹਿੰਦੀ ਜਿਹੜੀ ਜਿਹਨੂੰ ਅਸੀਂ ਕਹਿ ਨਹੀਂ ਸਕਦੇ ਸੀ ਇਹਦੇ ਉਹ ਕਹਿੰਦੀ ਅੱਧੀ ਘੱਟ ਸੀ ਕਿਹਾ ਨੇ ਬਾਲੂ ਦੀ ਗੋਈ ਦੀ ਕੋਈ ਸਾਡੇ ਕੋਲ ਹੋ। ਹੂੰ ਹੂੰ। ਗੁਰਬਾਣੀ ਚੋਂ ਸਾਡੇ ਜਿਹੜੇ ਅੰਦਰ ਗੱਲਾਂ ਨੇ ਉਹਦੀ ਸੈਟੀਸਫੈਕਸ਼ੀ ਹੁੰਦੀ ਔਰ ਕੁਝ ਤੋਂ ਇਹ ਵੀ ਦੇ ਵਿੱਚ ਸਮਾਇਆ ਹੋਇਆ ਉਹਨੂੰ ਸਹਜਤਾ ਦੇ ਨਾਲ ਆਪਾਂ ਪਾ ਸਕਦੇ ਹਾਂ ਜੀ। ਬਸ ਸਹਜ ਹੋਏ ਮਿਲ ਜੂਗਾ। ਜਿੱਦਣ ਠੀਕ ਜੀ ਜਿਹੜਾ ਜਿਹੜਾ ਨਾਨਕ ਨੇ ਗਾਇਆ ਜਸ ਉਹ ਜਸ ਜੇ ਆਪਾਂ ਗਾਵਾਂਗੇ ਤਾਂ ਆਪਣੇ ਅੰਦਰੋਂ ਵੀ ਉਹ ਪ੍ਰਗਟ ਹੋ ਜੂਗਾ ਅਧਰ ਹੈਗਾ ਇਹ ਪਹਿਲਾਂ ਹੀ ਹੈਗਾ ਅਸਲ ਕੋਈ ਜੀ ਦੀ ਸਭ ਕੁਝ ਘਰ ਜੀ ਹਾਂ ਦਾ ਤੁਹਾਨੂੰ ਉੱਧਰ ਬਿਠਾਉਣ ਦੀ ਬੈਠੋ ਤੁਹਾਡੇ ਕੋਲ ਸਭ ਕੁਝ ਆ ਠੀਕ ਹੈ ਜੀ ਇਹ ਸਾਰੇ ਜਿਹੜੇ ਹੁਣ ਤੱਕ ਆਪਾਂ ਕੀਤੇ ਜੀ 10 ਸਵਈਏ ਇਹ ਭੱਟ ਦੇ ਉਚਾਰੇ ਹੋਏ ਸੀ ਨਾਨਕ ਗੁਰੂ ਨਾਨਕ ਦੇ ਪ੍ਰਤੀ ਜੀ ਤੇ ਇਹ ਭਲੇਖਾ ਸਾਹਿਬ ਜੀ ਨੇ ਉਹਨਾਂ ਨੂੰ ਪਿਆ ਗੁਰੂ ਨਾਨਕ ਦੀ ਵਡਿਆਈ ਹੋ ਰਹੀ ਹੈ ਪਰ ਵਡਿਆਈ ਪਰਮੇਸ਼ਰ ਦੀ ਹੈ ਜੋ ਨਾਨਕ ਨੇ ਕੀਤੀ ਹੈ ਉਹ ਪ੍ਰਗਟ ਕੀਤੀ ਹੈ ਬਸ ਆ ਪ੍ਰਗਟ ਕੀਤੀ ਹੈ ਗੁਰੂ ਨਾਨਕ ਦੀ ਦੀ ਕੀਤੀ ਹੈ ਜੀ